जय श्री मोहल्ला पंचवां वार स्लोका नाल एक ओंकार सतगुरु प्रसाद शलोक आद पूरण मद पूरण अंत पूरण परमेशरा सिमरंत संत सर्वत रमण नानक अग्नासन जगदीश्वर ਜਿਵੇਂ ਇਹ ਲਫਜ਼ ਜਿਹੜਾ ਇਹਨਾ ਆ ਪਰਮੇਸ਼ਰ ਵਾਸਤੇ ਵਰਤੇ ਆ। ਅੱਛਾ ਜੀ। ਜਬ ਤਦਾਈਸ਼ਰ ਇਹ ਕਿਰ ਲਫਜ਼ ਵਰਤੇ ਆ ਨਾ ਉਹ ਭਗਤ ਕਹ ਲੋ ਵਰਤੇ ਆ। ਮਕਾਬਲ ਤੋਂ ਦੂਜੀ ਸ਼ਰ ਬ੍ਰਹਮਾ ਦੇ ਵੀ। ਵਿਅਕਤੀ ਜਿਹੜਾ ਜਿਹਨੇ ਵਿਅਕਤੀ ਨੇ ਜਨਮ ਲਿਆ ਆਇਆ ਉਹਦੇ ਵਾਸਤੇ ਇਹ ਲਫਜ਼ ਵਰਤੇ ਆ। ਤੇ ਈਸ਼ਵਰ ਤਾਂ ਇਹ ਨਹੀਂ ਈਸ਼ਵਰ ਇਹ ਸਰ ਕੋਈ ਵਰਤਦੇ ਨਹੀਂ ਜੀ ਗੁਰ। ਲਫਜ਼ ਉਹ ਅੱਗੇ ਪਰਮੇਸ਼ਰ। ਇਹ ਸਰ ਇੱਕ ਹੈ ਪਰਮੇਸ਼ਰ ਅਤੇ ਫਿਰ ਇੱਕ ਸਮੁੰਦਰ ਹੈ। ਉਹ ਬੂਹ ਦਾ ਸਮੁੰਦਰ। ਪੂਰਣ ਬ੍ਰਹਮ ਤੇ ਪਾਰ ਬ੍ਰਹਮ ਹੈ। ਹਾਂਜੀ ਹਾਂਜੀ। ਆਦ ਪੂਰਨ, ਮਦ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਪਰਮੇਸ਼ਰ ਨੇ ਹੀ ਜਗ ਦੀ ਸਿਰਜਣਾ ਜਿਹੜਾ ਸੀਗਾ ਆ ਜਦੋਂ ਰਚਨਾ ਸ਼ੁਰੂ ਕੀਤੀ ਸਾਜੀ ਜਿਹੜਾ ਪੂਰਨ ਕਰਨ ਵਾਲਾ ਪਰਮੇਸ਼ਰ ਸੀ ਹੁਣ ਵੀ ਉਹੀ ਪੂਰਨ ਕਰਦਾ ਸਭ ਨੂੰ ਜਾਣਦੇ ਰਿਹਾ। ਹਰ ਪ੍ਰਕਾਰ ਦੇ ਪੂਰਨਤਾ ਦੇ ਰਿਹਾ ਹੈ ਸਰੀਰ ਕਰਕੇ ਵੀ ਪੂਰਨਤਾ ਦੇ ਰਿਹਾ ਹੈ ਆਤਮਾ ਗਿਆਨ ਕਰਕੇ ਬੁੱਧ ਕਰਕੇ ਵੀ ਪੂਰਨਤਾ ਦੇ ਰਿਹਾ ਛੋਟਾ ਜਿਹਾ ਪੇੜ ਛੋਟਾ ਜਿਹਾ ਬੱਚਾ ਪੈਦਾ ਹੁੰਦਾ ਸਰੀਰ ਕਰਕੇ ਵੱਡਾ ਉਹ ਬੱਚਾ ਰੋਂਦਾ ਵੱਡਾ ਹੁੰਦਾ ਫਿਰ ਫਿਰਦ ਹੋ ਜਾਂਦਾ ਫਿਰ ਸਰੀਰ ਹਦਾ ਖਤਮ ਹੋ ਜਾਂਦਾ ਇਹ ਪੇੜ ਪੌਦਿਆਂ ਨੂੰ ਫਲ ਫੁੱਲਾਂ ਦੇ ਵਿੱਚ ਸਾਰੇ ਸਰੀਰ ਮਾਇਆ ਦੇ ਵਿੱਚ ਵੀ ਪੂਰਨਤਾ ਦੇ ਰਿਹਾ ਉਹ ਚੇਤਨਾ ਹੀ ਦੇ ਰਿਹਾ ਹੁਕਮ ਹੀ ਦੇ ਰਿਹਾ ਹੁਕਮ ਨਾਲ ਹੀ ਇਹ ਸਭ ਕੁਝ ਆਤਮਾ ਦੀ ਜਿਹੜੀ ਬੁੱਧ ਹੈ ਉਹਨੂੰ ਵੀ ਪੂਰਨਤਾ ਦੇ ਦੇ। ਅਧਪੂਰਨ ਆਤ ਤੋਂ ਲੈ ਕੇ ਮੱਧ ਵਿਚਾਲੇ ਵਿਚਾਲੇ ਅੰਤ ਵੇਲੇ ਤੱਕ ਜੋ ਉਹਦੇ ਹੋ ਜਾਂਦਾ ਪੂਰਨ ਬ੍ਰਹਮ ਤੱਕ। ਅੱਛਾ ਜੀ। ਬ੍ਰਹਮ ਤੋਂ ਪਾਰ ਬ੍ਰਹਮ ਤੱਕ ਜਿੱਨਾ ਚਿਰ ਸੱਚਖੰਡ ਨਹੀਂ ਜੀਵ ਜਾ ਵਰਦਾ ਉਹਨਾਂ ਚਿਰ ਇਹਨੂੰ ਪੂਰਾ ਕਰਦਾ ਹੀ ਰਹਿੰਦਾ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੋਈ ਹੁਕਮ ਪੂਰਾ ਕਰਦਾ ਕੋਈ ਵਿਚਾਲੇ ਤਬਦੀਲੀ ਨਹੀਂ ਆਉਂਦੀ। ਕੁਝ ਹੋਰ ਵੀ ਹੁਣ ਜਿਵੇਂ ਆਪਾਂ ਸਕੂਲ ਛੱਡ ਜਾਂਦੇ ਆ ਪਹਿਲਾਂ ਹੋਰ ਟੀਚਰ ਹੈਗਾ ਮਤਲਬ ਇਹ ਹੈ ਦਾ ਭਾਵ ਇਹ ਨਹੀਂ ਬਿਲਕੁਲ ਸੈਂਟਰ ਆਦ ਅਤੇ ਪੂਰਣ ਦੇ ਵਿੱਚ ਜਿਹੜਾ ਸਮਾਂ ਹੈ ਜੀ ਪਰ ਅੰਤ ਦੇ ਵਿਚਾਲੇ ਦਾ ਸਮਾਂ ਜਿਹੜਾ ਮੱਦ ਹੁੰਦਾ ਹਾਂਜੀ ਸੰਤ ਸਰਬੱਤ ਰਮਣੰ ਨਾਨਕ ਅਗ ਨਾਸ਼ਨ ਜਗਦੀਸ਼ੁਰ ਉਹਦਾ ਸਨਾਨ ਕਰਦੇ ਨੇ ਸੰਤ ਜਨ ਹੋਰ ਕਿਸੇ ਵਿਅਕਤੀ ਉਹ ਤੇ ਬਿਨਾਂ ਹੋਰ ਕਿਸੇ ਦਾ ਸਨਾਨ ਥੱਪ ਨਹੀਂ ਕਰਦੇ ਭਾਣੇ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦੇ ਭਾਣੇ ਨੂੰ ਮੰਨਦੇ ਲੋਕ ਮੂਕ ਮੰਨਦੇ ਨੇ ਫਿਰ ਸੰਤ ਸਰਬੱਤ ਰਮਣੰ ਦੇ ਵਿੱਚ ਜਿਹੜਾ ਵਿਆਪਕ ਹੈ ਦਾਨਕ ਆਗਨਾਸਨ ਦਾਨਕ ਆਗਨਾਸਨ ਹੋ ਜਿਹੜਾ ਆਪਣਾ ਹੁਕਮ ਕਰ ਦੇਣਾ ਪਾਪ ਕਰ ਦੇਣਾ ਜਿਹੜੇ ਉਹਨਾਂ ਦਾ ਨਾਸ ਕਰਦਾ ਸਾਡੇ ਅੰਦਰ ਜਿਹੜੀ ਕਲਪਨਾ ਪੈਦਾ ਹੁੰਦੀ ਹੈ ਮਾਇਆ ਦੀ ਇੱਛਾਵਾਂ ਜਗਦੀਸ਼ ਜਗਤ ਦਾ ਹੀ ਹੈ ਪਰਮੇਸ਼ਰ ਹੈ ਉਹ ਅਗ ਜਿਹੜੇ ਹੁੰਦੇ ਨਾਸ ਕਰ ਦਿੰਦਾ ਮਨ ਮਹਿ ਦ੍ਰਿੜੀਏ ਸਾਥ ਪੂਰ ਰਹੇ ਸਰਬਤਰਮੈ ਨਾਨਕ ਹਰ ਰੰਗੀ ਰਾਤ ਕਿਖਾ ਹੁੰਦਾ ਸਮਝਣਾ ਸੰਤ ਜਨਾ ਕੋ ਸੇਖਣ ਸਭ ਬ੍ਰਹਮ ਇਹ ਕੰ ਕਰਕੇ ਉਹਨ ਕਰਕੇ ਸਮਝਣਾ ਸਮਝਦੇ ਆ ਉਹਦੇ ਕਰਕੇ ਇਹ ਸੁਣਾਵਣ ਉਹ ਆ ਮਨ ਮੈਂ ਦਲੀਏ ਸਾਥ ਬਸ ਮੰਨ ਦੇ ਵਿੱਚ ਸੱਚ ਬੋਲੀਏ ਚਾਹ ਸੁਣੀਏ ਸੱਚ ਦੀ ਗੱਲ ਕਰੀਏ ਸੱਚ ਦੀ ਗੱਲ ਸੁਣੀਏ ਇਹ ਤਾਂ ਬਿਨਾ ਹੋਰ ਕੋ ਸੁਣਾ ਹੋਰ ਕੁਛ ਸੁਣਾਉਣਾ ਖਲਾ ਨਹੀਂ ਦਿੰਦੀ ਹੋਰ ਕੋ ਸੁਣ ਸੁਣਾਉਂਦੀ ਆਇਓ ਸੁਣਨ ਪੜਨ ਕੋ ਬਾਣੀ ਬਸ ਇਸੇ ਕੰਮ ਆਇਆ ਇਹੀ ਕੰਮ ਕਰੋ ਤਰਿਆ ਜਾਣਾ ਇਹ ਲਗਾਤਾਰ ਲੱਗੇ ਰਹੋ ਮਨ ਮੈਂ ਮਨ ਦੇ ਅੰਦਰ ਦ੍ਰਿੜੇ ਸਾਚ ਨੂੰ ਦ੍ਰਿੜ ਕਰੋ ਜੋਤ ਨੂੰ ਦ੍ਰਿੜ ਕਰੋ ਪੂਰ ਰਿਹਾ ਸਰਵਤਰਮ ਨਾਨਕ ਅੰਗਰਾਜ ਜਿਹੜੇ ਭਾਰਾਂ ਦੇ ਵਿੱਚ ਪੂਰ ਰਿਹਾ ਹੈ ਉਹ ਹਰ ਉਹ ਦੇ ਰੰਗਾਂ ਦੇ ਵਿੱਚ ਰਚੇ ਰਹੋ ਉਹਨਾਂ ਰਹੋ ਉਹਦੇ ਰੰਗ ਚ ਆਪਣੇ ਆਪ ਨੂੰ ਰੰਗਦੇ ਰਹੋ ਹਾਂਜੀ ਸੰਤ ਜਨ ਪਰਮੇਸ਼ਰ ਨੂੰ ਅਸੀਂ ਚੀਜ਼ ਪਰਮੇਸ਼ਰ ਨੂੰ ਸਿਮਰਨਾ ਕਿ ਆਪਣੇ ਮੂਲ ਨੂੰ ਸਿਮਰਨਾ ਪਹਿਲਾਂ ਆਪਣਾ ਮੂਲ ਨਾਲ ਜੁੜਨਾ ਜੁੜ ਕੇ ਉਹ ਮੂਲ ਨਾਲ ਗਾ ਪਰਮੇਸ਼ਰ ਨੂੰ ਸਮਰਨਾ ਆਪਣਾ ਮੂਲ ਨਾਲ ਜੁੜਨਾ ਤਾਂ ਮਾਇਆ ਨੂੰ ਛੱਡਣਾ ਹੀ ਹੈ ਸਿਰਫ ਅਸਲ ਵਿੱਚ ਤਾਂ ਭਗਤੀ ਮਾਇਆ ਨੂੰ ਛੱਡ ਕੇ ਬਾਅਦ 'ਚ ਇੱਕ ਹੋ ਕੇ ਸ਼ੁਰੂ ਹੁੰਦੀ ਹੈ ਨਾਨਕ ਇਹ ਵੀ ਦੇ ਹਰ ਪਜੋ ਇੱਕ ਮਾਨ ਹੋਏ ਕਿ ਚਿੱਤ ਜਿੰਨਾ ਜਿਮਾਨਾ ਚਿੱਤ ਇਤਨੀ ਹੈਗਾ ਉਹਨਾਂ ਚ ਤਾਂ ਭਗਤੀ ਉਹਨੂੰ ਸ਼ੁਰੂ ਹੁੰਦੀ ਇੱਕ ਗੱਲ ਜਿਹੜਾ ਉਹ ਗਿਆਨ ਨਾਲੇ ਕੁਝਦਾ ਉਹਦਾ ਸਿਰਫ ਇਹ ਦੇਖਣਾ ਆਪਾਂ ਨੇ ਵੀ ਇੱਕ ਹੋਣ ਕਰਕੇ ਆਪਣਾ ਕੁਝ ਇੱਕ ਤੋਂ ਬਿਨਾ ਤਾਂ ਫਿਰ ਸਾਰੀ ਤਾਂ ਰਹਿਣਾ ਝੂਠਾ ਤਾਂ ਇੰਨਾ ਹੀ ਗਿਆਨ ਕਰਾਰੇ ਇਹ ਬਾਣੀਆਂ ਕੋਲ ਉਹ ਜਿਹੜਾ ਆਪਾਂ ਕੰਮ ਕਰ ਰਹੇ ਨਾ ਜਾਣ ਵਾਲਾ ਨਹੀਂ ਜਾਣਦਾ ਉਹ ਛੜਾਏ ਰਹੀ ਹੈ ਸਿਰ ਪਹਿਲਾਂ ਗਿਆਨ ਤੇ ਛੜਾਏ ਰਿਹਾ ਪਰ ਜਿੱਥੇ ਹੁਣ ਲਿਖਦੇ ਨਾਨਕ ਹਰ ਰੰਗੀ ਮਾਇਆ ਦੇ ਨਿਕਲੂਗਾ ਤਾਂ ਹਰ ਰੰਗਾਂ ਚ ਰਹਿ ਜਾਏਗਾ ਹੀ ਫਿਰ ਉਹ ਜਿਹੜਾ ਇੱਕ ਮਨ ਹੈਗਾ ਉਹ ਸੰਤਾਂ ਕੋਲ ਹੁੰਦਾ ਉਹਨੇ ਫਿਰ ਪੂਰਨ ਪਰਮੇਸ਼ਰ ਨੂੰ ਉਦੋਂ ਤਾਂ ਪਹਿਲਾਂ ਫਿਰ ਘਰ ਬੈਸੋ ਹਰ ਜਨ ਪਿਆਰੇ ਇਥੋਂ ਰਾਧਾ ਸ਼ੁਰੂ ਹੋਊਗੀ ਫਿਰ ਹਾਂਜੀ ਪਹਿਲਾਂ ਤਾਂ ਸਮਝ ਰਹੀ ਹਾਂ ਵੀ ਕੀ ਕਰਨਾ ਹੈ ਕੀ ਕਰ ਰਹੇ ਨੇ ਤੂੰ ਪੁਰਾਣੇ ਤੂੰ ਆਇਓ ਲਾਹ ਲੈਣ ਲੱਗੇ ਕਿਤੇ ਕੋ ਫੜੇ ਤੂੰ ਉਲਟੇ ਕੋਹਰ ਦੇ ਝੂਠੇ ਕੰਮ ਜਿ ਲੱਗੇ ਕੋ ਫੜੇ ਝੂਠੇ ਕੰਮ ਸਭ ਮੁਕਦੇ ਚੱਲੀ ਜਾਣ ਪਹਿਲਾਂ ਤਾਂ ਸਮਝਾਇਆ ਹੀ ਹੈ ਜਦੋਂ ਕਹਿਨ ਦਾ ਭਾਵ ਫਿਰ ਇਹੀ ਬਣਦਾ ਕਿ ਸਭ ਤੋਂ ਪਹਿਲਾਂ ਤਾਂ ਇੱਕ ਹੋਣਾ ਮਾਇਆ ਨੂੰ ਛੱਡਣਾ ਹੈ ਜੇ ਮਾਇਆ ਨੂੰ ਛੱਡਿਆ ਫਿਰ ਉਹ ਜਪ ਹੋ ਗਿਆ ਉਸ ਤੋਂ ਬਾਅਦ ਫਿਰ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ ਜੀ। ਨਾਮ ਆਪਾਂ ਹੁਣ ਅੱਧੇ 'ਚ ਤਾਂ ਆ ਚੱਲੇ ਨਾ 705 ਪੰਨਾ ਹੈਗਾ ਇਹ। ਹਾਲੇ ਆਣੀ ਪਰਵਾਇ ਅੱਧ ਤੋਂ ਬਾਅਦ ਫਿਰ ਉਹ ਆਰਾਧਨਾ ਦੀ ਗੱਲ ਚੱਲੀ ਆ ਇਹ ਕੌਣ ਗੱਲ ਦੱਸੀ ਦੀ ਹੋਈ ਇਸ਼ਾਰਾ ਹੀ ਕੀਤਾ ਹੋਇਆ। ਜਦੋਂ ਆਪਾਂ ਅਖੰਡ ਪਾਠ ਦੀ ਰਸਮ ਸਿੱਖਾਂ 'ਚ ਜਿਹੜੀ ਚੱਲਦੀ ਆ ਰਹੀ ਹੈ ਐਸ ਸਲੋਕ ਤੇ ਫਿਰ ਉਹ ਮੱਧ ਦੀ ਅਰਦਾਸ ਸ਼ੁਰੂ ਕਰਦੇ ਆ ਉਹ ਕਹਿੰਦੇ ਕਿ ਇੱਥੇ ਹੁਣ ਆਦ ਪੂਰਨ ਹੋ ਗਿਆ ਹੁਣ ਮੱਧ ਪੂਰਨ ਇੱਥੋਂ ਸ਼ੁਰੂ ਹੋ ਰਿਹਾ ਉਹ ਤਾਂ ਪਲੇਖਾ ਉਹਨਾਂ ਮੱਧ ਹੈ ਨਹੀਂ ਹੈ ਨਹੀਂ ਮੱਧ ਇੱਥੋਂ ਇੱਥੇ 705 ਹੈ 715 ਮੱਧ ਬਣਦਾ ਉਹਨਾਂ ਕੋਲ ਇੱਕ ਹੋਰ ਵੀ ਜਵਾਬ ਹੈ ਉਹ ਕਹਿੰਦੇ ਜੇ ਤੁਸੀਂ ਅੱਖਰ ਗਿਣੋ ਨਾ ਇੱਥੋਂ ਪਿੱਛੇ ਔਰ ਇੱਥੋਂ ਅੱਗੇ ਅੱਖਰ ਬਿਲਕੁਲ ਆਦ ਅਦ ਬਣ ਜਾਂਦੇ ਉਹ ਐਵੇਂ ਕਹਿੰਦੇ ਨੇ ਬੜਲੇ ਨਹੀਂ ਹਣ ਉਹ ਤਾਂ ਉਹ ਗੱਲ ਆ ਵੀ ਨਾਨਾ ਵਾਂ ਟਾਈਲ ਹੋਵੇ ਨਾ ਰਗਾ ਨਚੇ ਨਾ ਗਏ ਨਾ ਜੰਨੇ ਨਾ ਵਾਸਾ ਕਹਿਤਾ ਮੈਂ ਇਹ ਵੀ ਗਲਤ ਕਹਿੰਦੇ ਨੇ ਉਹ ਠੀਕ ਹੈ ਜੀ ਪਰ ਉਹ ਇੱਕ ਗੱਲ ਹੋਇਆ ਵੀ ਇੱਕ ਦਿਨ ਦਾ ਬਿਹ ਪ੍ਰਸਾਦ ਜਿਹੜਾ ਹੈ ਦੂਏ ਦੇ ਨਮਾ ਬਣਾਉਣਾ ਇਸ ਪੱਖੋਂ ਤਾਂ ਉਹ ਗੱਲ ਦਾ ਕੋਈ ਮਤਲਬ ਬਣਦਾ ਇਹੀ ਨਾਲੇ ਗੁਰੂ ਘਰ ਦੇ ਵਿੱਚ ਨਿੱਤੇ ਹੀ ਪ੍ਰਸ਼ਾਦ ਛਕਦਾ ਹੁੰਦਾ ਠੀਕ ਆ ਰੋਜ਼ਾਨਾ ਪਾੜ ਪ੍ਰਕਾਸ਼ ਹੈ ਤਾਂ ਦੂਏ ਦਿਨ ਵੀ ਤਾਂ ਸਜਾਉਣਾ ਚਾਹੀਦਾ ਹੀ ਹੈ। ਉਹਨਾਂ ਨੂੰ ਕਿਹਾ ਵੀ ਤੁਸੀਂ ਕੋਲ ਨਾ ਕਰਿਓ ਵੀ ਤਾਜ਼ਾ ਪ੍ਰਸ਼ਾਦਾ ਚ ਫੇਰ ਬਣਾਓ। ਹਾਂਜੀ। ਸੋਈ ਕਰਨ ਕਰੇ ਸੋ ਹੋਈ ਗੁਣ ਗਾਇਨ ਕਰਿਆ ਉਹ ਨਿਰੰਜਨ ਦਾ ਕਰਿਆ ਮਾਇਆ ਜਿਹੜਾ ਤਾਜਾ ਉਹਦਾ ਜੋਤਵਾ ਹੋ ਗਿਆ ਜਨ ਜਸਦਾ ਨਹੀਂ ਕਰਿਆ। ਜਿੰਨਾ ਵੀ ਗੁਣ ਗਾਇਨ ਹੈ ਜਾ ਤਦਾ ਜੋਤਦਾ ਜੀ ਉਹ ਖਾ ਨੂੰ ਢਿੰਡਾ ਉਹਦੀ ਗੱਲ ਕੀਤੀ ਹੈ ਠੀਕ ਹੈ ਸਰੀਰ ਕਰਕੇ ਜੋ ਉਹਦੇ ਗੱਲ ਦੇਵੀ ਦੇਵਤਾ ਦਾ ਜਿਵੇਂ ਵੀ ਕੀਤਾ ਉਹਨਾਂ ਨੇ ਅਸੀਂ ਇਦਾਂ ਕਰਨਾ ਹਰ ਇੱਕ ਨਰੰਜਨ ਧਾਈ ਹੈ ਸਭ ਅੰਦਰ ਜਿਹੜਾ ਸਾਰਿਆਂ ਦੇ ਅੰਦਰ ਉਹ ਰਾਮ ਸਾਡੇ ਵਾਲਾ ਆਮ ਜਾਰਿਆਂ ਦੇ ਅੰਦਰ ਹੀ ਹੈ ਤੇ ਉਹ ਇੱਕ ਕਿਉਂ ਲਿਖਦੇ ਉਹ ਇੱਕੋ ਜਿਹਾ ਰੂਪ ਐ ਇੱਕ ਸੁਧ ਹੈ ਨਾ ਜਿਹੜਾ ਸ਼ੁੱਧਮਨ ਹੁੰਦਾ ਉਹ ਇੱਕੋ ਹੀ ਹੁੰਦਾ ਹੱਸ ਜਿਹੜਾ ਅਸ਼ੁੱਧ ਹੁੰਦਾ ਉਹ ਚ ਫਰਕ ਹੁੰਦਾ ਕੋਈ ਜ਼ਿਆਦਾ ਸ਼ੁੱਧ ਹੈ ਕੋਈ ਵੱਧਾ ਸ਼ੁੱਧ ਹੈ ਇਹ ਸ਼ੁੱਧ ਜਿਹੜਾ ਮਾਨ ਹੈ ਨਾ ਉਹਦੀ ਗੱਲ ਆ ਜਿਵੇਂ ਅੰਤਰਾਤ ਬੰਦੇ ਵਾਂਗਰ ਨਹੀਂ ਮਿਲਦੀ ਆਪਸ ਵਿੱਚ ਦੂਈ ਨਹੀਂ ਮਿਲਦੀ ਬਾਣ ਇੱਕ ਦਾ ਭਾਵ ਐ ਨਹੀਂ ਵੀ ਇੱਕ ਹੋਇਆ ਹੋਇਆ ਪਰ ਜਿਹੜਾ ਸਭ ਦੇ ਵਿੱਚ ਇੱਕ सार ਹੈਗਾ ਜਿਹੜਾ ਅੱਧਾ ਇਹਨਾਂ ਦਾ ਇੱਕੋ ਜਿਹਾ ਹੈ ਜਿਹੜਾ ਸਾਰਿਆਂ ਵਿੱਚ ਅੱਛਾ ਮਨ ਕਰਕੇ ਫਰਕ ਆ ਚਿੱਤ ਕਰਕੇ ਫਰਕ ਨਹੀਂ ਆਪਣੇ ਚਿੱਤ ਨੂੰ ਗਾਉਣਾ ਇਹ ਦੱਸਿਆ ਹੈ ਜੀ ਹਾਂਜੀ ਆਪਣੇ ਮੂਲ ਨੂੰ ਆਪੇ ਜਦੋਂ ਆਪਣੇ ਆਪ ਹਾਂਜੀ ਸਭ ਅੰਤਰ ਸੋਈਓ ਸਾਰੇ ਦੇ ਅੰਤਰ ਇੱਕਤ ਜਾਈਏ ਹਾਂਜੀ ਕੋਈ ਨਹੀਂ ਤਾਂ ਤੇਰੇ ਅੰਦਰ ਹੀ ਹੈ ਸਭ ਨੂੰ ਅੰਦਰ ਹੀ ਹੈ ਤਾਂ ਹੀ ਕਿਹਾ ਹੋਇਆ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਉਹ ਪ੍ਰਭ ਜਿਹੜਾ ਕਰਨ ਕਰਨ ਸਮਰੱਥ ਹੈ ਉਹ ਜੋ ਕਰਦਾ ਹੋਈ ਹੁੰਦਾ ਇਹ ਠੀਕ ਆ ਸੱਚ ਨਾਲ ਨਾ ਹੁਕਮ ਬਣਦਾ ਆਪਣਾ ਹੁਕਮ ਚਲਾਉਂਦੇ ਆ ਬੰਨ ਕੇ ਆਪਣਾ ਹੁਕਮ ਪਹਿਲਾ ਹੁੰਦਾ ਮਨ ਬੁੱਧੀ ਦੇ ਪਿੱਛੇ ਆਪਣੀ ਇੱਛਾ ਪੈਦਾ ਹੁੰਦੀ ਹੈ ਦੇਖ ਕੇ ਮਾਇਆ ਨੂੰ ਮਾਇਆ ਨੂੰ ਜੋ ਦੇਖ ਰਏ ਅੰਦਰ ਇੱਛਾ ਪੈਦਾ ਹੁੰਦੀ ਹੈ ਜਿਹੜੀ ਉਹੀ ਇਹਦਾ ਹੁਕਮ ਆਹ ਸਿੰਮੈ ਥਾਪ ਥਾਪ ਦਾ ਬੰਦ ਕਰ ਲੈਣਾ ਨਾ ਜਦੋਂ ਥਾਪਿਆ ਜਾਣਾ ਪ੍ਰਭ ਦਾ ਗੁਣ ਹੈ ਹਾਂ ਜੀ ਬਿਲਕੁਲ ਬਿਲਕੁਲ ਬਿਲਕੁਲ ਉਹਨੂੰ ਹੁਕਮ ਹੈ ਨਾ ਜਦੋਂ ਨੂੰ ਹੁਕਮ ਹੈ ਵੀ ਗਾਂ ਦਾ ਸਾਥ ਨਹੀਂ ਲੈਣਾ ਉਹਨੇ ਜਦੇ ਬੰਦ ਕਰ ਦੇਣਾ ਕੋਈ ਬੰਦਾ ਹਾਂ ਜੀ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਤੋ ਸੀ ਨਿਰਮਲ ਜਨ ਸੋਈ ਖੰਡ ਆ ਗਿਆ ਖੰਡ ਦੀ ਅੰਸ ਖੰਡ ਜੀਵਾਤਮਾ ਖੰਡ ਹੈ ਬ੍ਰਹਮੰਡ ਜਿਹੜਾ ਹੈਗਾ ਇਹਦਾ ਮੂਲ ਉਹ ਬ੍ਰਹਮਾੰਡਾ ਜੋ ਬ੍ਰਹਮਾੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਖੋਜ ਕਰਨੀ ਆਪਾਂ ਨੇ ਆਪਣੀ ਮੂਲ ਦੀ ਪਛਾਣ ਕਰਨੀ ਇਹ ਖੰਡ ਹੈ ਕੋ ਕਬੀਰ ਤੂੰ ਰਾਮ ਕੀ ਅੰਸ ਜਿਹੜੀ ਆਸਤੋ ਖੰਡਾ ਜਿਹੜੀ ਅੰਸਾ ਉਹ ਬ੍ਰਹਮੰਡ ਹੈ। ਰਾਮ ਬ੍ਰਹਮੰਡ ਹੋ ਗਿਆ ਤੇ ਅੰਸ਼ ਜਿਹੜੀ ਹੈ ਉਹ ਉਹ ਖੰਡ। ਦੋਵੇਂ ਹੋ ਗਏ ਨਾ ਢਾਲ ਹੋ ਗਈ ਨਾ। ਖੰਡ ਬ੍ਰਹਮੰਡ ਦੀ ਉਹ ਢਾਲ ਚੇਤਨ ਖੰਡ ਨਹੀਂ ਬ੍ਰਹਮੰਡ ਦੇ ਵਿੱਚ ਸਮਾਉਂ ਲੈ ਹੋ ਜਾਣਾ, ਅੰਡ ਬਣ ਜਾਣਾ। ਉਹਨੇ ਫਿਰ ਫੂਟੋ ਆੜਨਾ ਭਰਮ ਦਾ ਜਿਹਦੇ ਕਰਕੇ ਭਲੇਖਾ ਪੈਂਦਾ ਸ਼ਾਇਦ ਇਹ ਚੀਜ਼ਾਂ ਜੜ੍ਹ ਹੋਣ ਪਕਾਪ ਦੇਵਤਾ ਦੇ ਵਿੱਚ ਦੀਪ ਦੇ ਵਿੱਚ ਜਿਹੜੇ ਜੀਵ ਨੇ ਉਹਨਾਂ ਦੀ ਗੱਲ ਹੈ ਸਾਰੇ ਅੱਛਾ ਜੀਵ ਪਤਾਲ ਦੇ ਵਿੱਚ ਵੀ ਨੇ ਪਾਣੀ ਦੇ ਵਿੱਚ ਵੀ ਨੇ ਜੀਵ ਵਿੱਚ ਹਾਲ ਹੋਰ ਜਲ ਦੇ ਵਿੱਚ ਜੀਵ ਨੇ ਜਿਹੜੇ ਉੱਥੇ ਵੀ ਨੇ ਆ ਬਾਹਰ ਟਾਪ ਹੁੰਦੇ ਵੀ ਨੇ ਹਾਂਜੀ ਪਰ ਜਿਹੜੇ ਆਮੇ ਅਰਥ ਕਰਦੇ ਆ ਉਹ ਕਹਿੰਦੇ ਵੀ ਖੰਡ ਧਰਤੀ ਦੇ ਹਿੱਸੇ ਆ ਬ੍ਰਹਮੰਡ ਬ੍ਰਹਮ ਦਾ ਅੰਡਾ ਹੈਗਾ ਤੇ ਉਹਨਾਂ ਨੂੰ ਖੰਡ ਉਹਦੇ ਖੰਡ ਲੀਆਂ ਜੇ ਜੇ ਲੱਗਿਆ ਕੌਗਬਿਰ ਤੋਂ ਰਾਮਕੀਰਨ ਸੋ ਉਹ ਹੰਦ ਫਿਰ ਕੀ ਉਹ ਛੱਡ ਗਏ ਧਰਤੀਆਂ ਦਾ ਜੀ ਹੋਰ ਥੋੜੀਆਂ ਨੇ ਪਲੈਨਟ ਹੋਰ ਥੋੜੇ ਨੇ ਕਿ ਤੇ ਐਸੇ ਧਰਤੀ ਦੀ ਨੇ ਨੇ ਵੀ ਬੌਲਦੇ ਸਿੰਘ ਤੇ ਟਿਕਾਇਆ ਹੋਇਆ ਆਪੇ ਨੂੰ ਹੋਰ ਉਹ ਕਿਸੇ ਨੂੰ ਉਦੋਂ ਕਿਹੜਾ ਅਮਰੀਕਾ ਦਾ ਪਤਾ ਸੀ ਹਾਂਜੀ ਠੀਕ ਹੈ ਜੀ ਠੰਡ ਬ੍ਰਹਮੰਡ ਪਾਤਾਲ ਦੀਪ ਪਤਾਲ ਦਾ ਕਹਿਣਾ ਮਤਲਬ ਹੈਗਾ ਥਾਲ ਵਿੱਚ ਤੇ ਦੀਪ ਦਾ ਕਹਿਣਾ ਮਤਲਬ ਜਲ ਵਿੱਚ ਇਸ ਤਰ੍ਹਾਂ ਵੀ ਹੈ ਕੁਝ ਹਾਂਜੀ ਹਾਂਜੀ ਰਵਿਆ ਸਭ ਲੋਈ ਜੀਵ ਆਤਮਾ ਜਿੰਨੇ ਵੀ ਇਹ ਲੋਏ ਆ ਹੋ ਉਹਨਾਂ ਹੋਇਆ ਉਹਦੀ ਉਹਦੀ ਉਹ ਰੋਸ਼ਨੀ ਹੈ ਕਹਿ ਲਓ ਸਾਰਿਆਂ ਵਿੱਚ ਸਭ ਨੇ ਜੋਤੀ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਬਸ ਕਹਿੰਦੇ ਹੁਣ ਇਹ ਬੁਝਣ ਵਾਲੀ ਚੀਜ਼ ਹੈ ਜਿਹਨੂੰ ਆਪ ਪਹਜਾਵੇ ਉਹ ਬੁਝਦਾ ਵੀ ਮੈਂ ਕੁਝ ਨਹੀਂ ਹੈ ਕ ਮੇਰੇ ਵਿੱਚ ਉਹਦੀਓ ਜੋਤ ਹੈ ਮੈਂ ਜੋਤ ਮੇਰੇ ਵਿੱਚ ਉਹ ਹੀ ਰਵੜਿਆ ਪਰ ਅੰਦਰ ਮੈਂ ਉਹ ਖੜਾ ਛੱਡਦਾ ਫਿਰ ਕਿਹਾ ਲੈਂਦਾ ਫਿਰ ਫਿਰ ਮੰਨਦਾ ਫਿਰ ਨਿਰਮਲ ਹੋ ਜਾਂਦਾ ਫਿਰ ਮਾਰੇ ਕਿ ਤਰ੍ਹਾਂ ਦੀ ਮੈਂ ਹਰਦਾ ਜੇ ਆਪਣੇ ਰਸਤੇ ਤੱਕ ਦੀਓ ਮਾਰਿਆ ਹੰਕਾਰ ਦੀਓ ਮਾਰਿਆ ਪਰਮਜੀਤ ਜੀ ਮਾੜਾ ਨਿਰਮਲ ਜਨ ਦੇ ਪਦ ਨੂੰ ਪ੍ਰਾਪਤ ਹੋ ਜਾਂਦਾ ਹੈ ਜੀ ਨਿਰਮਲ ਜਾਣਕਾਰੀ ਹੈ ਉਹਦੀ ਉਹਦੀ ਜਾਣਕਾਰੀ ਜਿਹੜਾ ਹੁਣ ਭਰਨ ਦੀ ਅੰਸ਼ ਨਹੀਂ ਰਹੀ ਠੀਕ ਹੈ ਜੀ ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ